ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਜੋਤ ਰੂਪ ਹਰ ਆਪ ਹੂੰ ਹੂੰ ਜੋਤ ਰੂਪ ਹਰ ਆਪ ਗੁਰੂ ਗੁਰੂ ਹਾਂਜੀ ਮੇਰਾ ਗੁਰੂ ਆਹਦਾ ਹਰਿਆਣਾ ਹੂੰ ਹੂੰ ਇਹ ਦੋਇ ਜੋਤ ਰੂਪ ਮਾਛੇ ਜੀ ਹਰ ਹਰ ਗੁਰ ਹਾਂ ਇਹ ਹਰ ਗੁਰੂ ਬਾ ਗੁਰੂ ਵੀ ਜੋਤੂ ਬੇ ਠੀਕ ਹੈ ਜੀ ਹਾਂ ਜੋਤੂ ਬਾ ਹਰ ਆਪੇ ਗੁਰੂ ਗੁਰੂ ਠੀਕ ਹੈ ਜੀ ਇਹ ਹਰ ਗੁਰੂ ਆ ਜੋਤੂ ਜਿਹੜਾ ਹਰ ਆਪ ਹੀ ਗੁਰੂ ਦੋ ਦੂਪ ਹੈ ਜਿਹੜਾ ਆਪ ਹੀ ਗੁਰੂ ਹੈ ਠੀਕ ਹੈ ਜੀ ਗਾਨਕ ਕਹਾਇਓ ਗਾਨਕ ਤੋਂ ਤਾਂ ਇਹ ਗੱਲ ਦਾ ਦੂ ਕਹਾਈ ਹੈ ਪਰਮੇਸ਼ਰ ਦੇ ਵੀ ਆਖ ਹੈ ਹਰ ਜਿਹੜਾ ਹੈ ਨਾ ਫੇਰਾ ਜਿਹੜਾ ਏਜੰਟ ਬੈਠਾ ਤੇਰੇ ਅੰਦਰ ਇਹ ਹੈ ਮਾਇਆ ਇਹ ਗੁਰੂ ਆ ਗੁਰੂ ਦਾ ਬਾਣਾ ਗੁਰੂ ਦਾ ਵਾਹੋਂ ਆ ਹੂੰ ਇਹ ਦੋ ਇੱਕੋ ਹੀ ਹੋ ਹੂੰ ਇੱਥੇ ਹੀ ਉਹ ਜਿਹੜਾ ਬੇਲਾ ਇਹ ਇੱਥੇ ਦੇਣ ਵਾਲਾ ਹੂੰ ਹੂੰ ਯਾ ਮੈਂ ਤਾਂ ਬੰਦਾ ਸੰਦ ਦੀ ਮਾਇਆ ਹੁੰਦਾ ਹੈ ਆਪਦਾ ਵੀ ਕਹਿੰਦਾ ਮੈਂ ਗੁਰੂ ਹਾਂ ਕਦੇ ਵੀ ਆਪਦਾ ਵੀ ਮੰਨਦਾ ਵੀ ਮੈਂ ਗੁਰੂ ਹਾਂ ਹੂੰ ਆਪ ਤਾਂ ਦਾਸ ਹੀ ਬੰਦਾ ਹੈ ਆਪਣੇ ਨੂੰ ਸਤਗੁਰੂ ਵੀ ਕਹਿੰਦਾ ਹੈ ਪਰ ਮੈਂ ਦੱਸਦਾ ਤੈਨੂੰ ਵੀ ਇਹ ਜਿਹੜਾ ਹਰ ਨਾ ਇਹ ਆਪੇ ਗੁਰੂ ਹੈ ਹੂੰ ਹੂੰ ਅੱਛਾ ਇਹ ਜੇ ਗੁਰੂ ਗੁਰੂ ਹੂੰ ਫਰੀਰ ਨਾਲ ਬਾਲ ਨਾਲ ਜੁੜਿਆ ਜਿਹੜੀ ਗੁਰੂ ਦਾ ਸਰੀਰ ਵਾਲਾ ਗੁਰੂ ਹੁੰਦਾ ਇਹ ਵੀ ਗੁਰੂ ਕਦੇ ਜਾਂਦਾ ਹੀ ਨਹੀਂ ਆਹ ਗੱਲ ਆਹ ਬਾਤ ਹੈ ਹੂੰ ਨਾਨਕ ਤੋਂ ਕਹਾਇਆ ਆਜਾਦ ਫਿਰ ਅੰਗਦ ਆ ਗਿਆ ਹੂੰ ਹੂੰ ਅੰਗਦ ਗੱਲ ਅੰਬਲ ਕਰਨ ਲੱਗ ਗਿਆ ਈ ਗੱਲ ਤਾਂ ਗਈ ਹੈ ਹੂੰ ਗੁਰਮੁਖੀ ਕੋਰਨ ਨਾਲ ਹੂੰ ਜਾਂ ਤੋਂ ਕੋਰਨ ਨਾਲ ਹੂੰ ਸਾਦੇ ਅੰਦਰ ਦੇ ਬਾਅਦ ਅੰਦਰ ਅਕਾਦਮੀ ਨਾਲ ਦੇ ਉਹ ਹੂੰ ਸਾ ਤੇ ਜੂ ਸਾ ਤੇ ਬਣਾਇਓ ਤਾਂ ਕਿਹ ਤਰ੍ਹਾਂ ਕੋ ਹੋਵੇ ਹੂੰ ਸਾਦਨ ਨਾਲ ਸਾ ਮਿਲ ਕੇ ਅਜੇ ਤਰ੍ਹਾਂ ਦੇ ਕੋ ਜਨਕੂ ਹੋ ਗਿਆ ਹੋ ਗਿਆ ਜੀ ਹੂੰ ਹੂੰ ਨਾੜਕ ਤਾਂ ਇਹੋ ਪੁੱਜਦਾ ਹੋ ਗਿਆ ਹੂੰ ਹਾਂ ਅੰਗਦ ਕਿਰਪਾ ਕੀਤੀ ਹੂੰ ਉਪਦੇਸ਼ ਕੀਤਾ ਹੂੰ ਹਾਂ ਆਸ ਵੇਗੇ ਸਾਧਗੁਰ ਦੇ ਆਪਰੋ ਸਾਧਗੁਰ ਫਿਰਦੀ ਹੂੰ ਉਹਨਾਂ ਨੂੰ ਟਿਕਾਤਾ ਫਿਰ ਕਰਤਾ ਹੂੰ ਅਮਰਦਾਸ ਉਹ ਉਪਦੇਸ਼ ਕੀਤਾ ਉਪਦੇਸ਼ ਕੀਤਾ ਇੰਦੀ ਗੱਲ ਆਈ ਹੈ ਹਾਂ ਠੀਕ ਹੈ ਜੀ ਹਾਂ ਉਪਦੇਸ਼ ਦਾ ਹੀ ਚੱਲੇ ਕੰਮ ਅੱਗੇ ਤੋਂ ਅੱਗੇ ਹਾਂ ਅਮਰਦਾਸ ਅਮਰਤ ਛੱਤਰ ਗੁਰ ਰਾਮਹਿ ਦਿਓ ਆ ਦੇਖੋ ਅਮਰ ਦੇ ਘਟਾ ਦੇਤਾ ਉਹਦੇ ਅਸਲੀ ਕੀਤਾ ਹੂੰ ਹੂੰ ਉਹ ਬਣਾ ਲਾ ਰਾਜ ਦੇਤਾ ਹੂੰ ਹੂੰ ਇਹ ਤਾਂ ਦੂਈ ਵਾਰ ਫੇਰ ਆ ਗਈ ਗੱਲ ਤੀਹ ਵਾਰ ਆਈ ਐਸ ਹੈ ਗੱਲ ਹਾਂਜੀ ਤਿਆਰ ਸੀ ਉਹ ਨਾਲਾ ਲੈ ਜੀ ਮੇਰੇ ਵਾਲਾ ਰਾਤ ਤੂਰ ਅਰਜਨ ਪਰਸ ਕਹਿ ਮਥੁਰਾ ਅੰਮ੍ਰਿਤ ਨੇ ਕੀ ਕੀਤਾਗਾ ਹੂੰ ਦਰਸ਼ਨ ਪਰਸ ਉਹਨੇ ਵੀ ਆਪਣਾ ਦਰਸ਼ਨ ਕਰ ਲਿਆ ਆਤਮ ਹੋ ਗਈ ਆਪਣਾ ਮੋਹਲਾ ਮਾਣ ਰਿਹਾ ਆਪਣੇ ਮੋਹ ਦਾ ਸਪਰਸ਼ ਕਰਨ ਲਿਆ ਬੰਦੇ ਹਾਂ ਹਾਂ ਆ ਤੋ ਬਕਰ ਚੁੜਿਆ ਮੂਰਤ ਪੰਜ ਪ੍ਰਮਾਨ ਪੁਰਖ ਗੁਰ ਅਰਜਨ ਏਖੋ ਨੈਣ ਮੂਰਤ ਪੰਜ ਪ੍ਰਮਾਨ ਪੁਰਖ ਗੁਰ ਅਰਜਨ ਏਖੋ ਨੈਣ ਹਾਂਜੀ ਮੂਰਤ ਪੰਚ ਪਾਟ ਗਿਆ ਪੰਚ ਭਗਤਾਂ ਦੇ ਦੇ ਪੰਚ ਪ੍ਰਵਾਹ ਨਾਲ ਪੰਚ ਪ੍ਰਤਿਹਾਣ ਨਾਲ ਪੰਚ ਪਾਵਨ ਦੇਰਗਾਹਾਂ ਨੂੰ ਉਹ ਕੌਣ ਹੈ ਪੰਚ ਕੌਣ ਹੈ ਇੱਕ ਮੂਰਤ ਪੰਚ ਪ੍ਰਵਾਹ ਜਿਹੜੀ ਪੰਚਾਂ ਦੇ ਭਗਤਾਂ ਨੇ ਮੂਰਤ ਪ੍ਰਵਾਹਨ ਕੀਤੀ ਆ ਹਾਰ ਮੂਰਤ ਇਹੋ ਹਾਰ ਮੂਰਤ ਰਹਿਣਾ ਨੇ ਇਹ ਸਾਰੇ ਭਗਤਾਂ ਦੀ ਪ੍ਰਵਾਹ ਕੀਤੀ ਹੋਈ ਮੂਰਤ ਹੂੰ ਇਹ ਮੂਲ ਤਾਂ ਆਉਂਦੀ ਯਾਰ ਇੱਕ ਦੀ ਇੱਕ ਦਾ ਸਰੂਪ ਇੱਕ ਦਾ ਸਰੂਪ ਹੈ ਜਿਹੜਾ ਭਗਤਾਂ ਨੇ ਕੀਤਾ ਹੋਇਆ ਬੰਦਿਆ ਹੋਇਆ ਉਹ ਮੂਲ ਮੰਤਰ 'ਚ ਲਿਖਿਆ ਹੋਇਆ ਠੀਕ ਹੈ ਜੀ ਪ੍ਰਮਾਣ ਕਰਕੇ ਉਹ ਦੇਖੋ ਨੈਣ ਗੁਰ ਅਰਜਣੇ ਆਪਣਾ ਆਪਣੇ ਅੰਦਰਲੀ ਅੱਖ ਨਾਲ ਉਹਦਾ ਦਰਸ਼ਨ ਕਰ ਹੂੰ ਹੂੰ ਜਦ ਅੱਜ ਆਪ ਇੱਕ ਹੋ ਕੇ ਰਹਿ ਗਿਆ ਤਾਂ ਉਹਨੂੰ ਇੱਕ ਦਾ ਗਿਆਨ ਹੋ ਗਿਆ ਹੂੰ ਹੂੰ ਆਤਮਦਰਸ਼ਿਤ ਚੋੜ ਇੱਕ ਦਲ ਹੂੰ ਹੂੰ ਤੇ ਖੋਦ ਹੂੰ ਜੇ ਤਖੋ ਖੰਵਾਣੀ ਦਿਖੋ ਕਾਹ ਵੇਖਿਆ ਜਦ ਆਪ ਇੱਕ ਹੋ ਗਿਆ ਤਾਂ ਉਹਨੂੰ ਵੀ ਇੱਕ ਦਾ ਗਿਆਨ ਹੋ ਗਿਆ ਵੀ ਆਹੀ ਹੁੰਦਾ ਕਿ ਗੁਰੂ ਆਪ ਦਾ RAMDAS ਨੇ ਕਿਹਾ ਤੁਸੀਂ ਕਹਿੰਦੇ ਇੱਕ ਹੋਰ ਕੀ ਹੈ ਉਹ ਤੋਂ ਇੱਕੋ ਹੀ ਹੈ ਆ ਜਿਹੜਾ ਤੇਰਾ ਟਿਕਿਆ ਹੋਇਆ ਮਨ ਆਏ ਤੇਰੀ ਅਵਸਥਾ ਤੋਂ ਆਪੇ ਮੈਨੂੰ ਦੱਸਣਾ ਪਹਿਲਾਂ ਹੋਇਆ ਹੋਇਆ ਹੂੰ ਤਾਂ ਦੱਸਦਾ ਹੀ ਹੁੰਦਾ ਠੀਕ ਦੂਆ ਦਾ ਦੱਸਦਾ ਨਵੀ ਆ ਐ ਹੋਏ ਤਾਂ ਸੋਝੀ ਪਾਏ ਉggen ਮੈਂ ਆਹ ਨੂੰ ਦੱਸਣਾ ਹੋਵੇ ਸੋ ਜੀ ਹੁਣ ਕਹੇ ਤਾਂ ਤੁਸੀਂ ਆਪ ਹੈ ਓਏ ਆ ਸੋਬ ਤੋਂ ਹੋ ਕਹਿਣਾ ਉਹੀ ਗੱਲ ਹੈ ਹਾਂ ਹਾਂ ਹਾਂ ਠੀਕ ਹੈ ਸਤ ਰੂਪ ਸਤ ਨਾਮ ਸੰਤੋਖ ਧਰਿਓ ਉਰ ਨਾਮ ਸਤਿਗੁਰੂ ਪ੍ਰਸਾਦਿ ਨਾਮ ਸਤਿ ਸਤੋਖ ਧਰਿਓਰ ਹੂੰ ਸਤਿਗੁਰੂ ਹੀ ਰਾਜੀ ਆਪਣਾ ਸਤਿ ਸਰੂਪ ਤਾਉ ਦਾ ਆਪਣੀ ਹੂੰ ਹੂੰ ਸਤਿਨਾਮ ਸਤਿਨਾਮ ਵੀ ਆਪੇ ਸੀ ਉਹ ਹੂੰ ਸਤਿ ਸੰਤੋਖ ਦਾ ਧਾਰਨੀ ਸੀ ਉਹ ਹੂੰ ਆਹ ਇਹਦੇ ਜੇ ਗੁਣ ਰੱਖ ਨੇ ਇਹ ਗੁਣ ਤੇ ਕੀ ਗੁਣ ਤੇ ਹੂੰ ਜੇ ਗੁਣ ਤੇ ਇਹਦਾ ਬੰਦਿਆ ਹਿਰਦੇ ਜੇ ਗੋਣ ਨੇ ਇਹਦੇ ਆਪਣੀ ਗੋਣ ਨੇ ਜਿਹਦੇ ਹਿਰਦੇ ਜੀ ਗੋਣ ਹੁੰਦਾਰੇ ਉਹਦੇ ਨੇ ਉਹ ਜੀ ਜੀ ਦੇਵ ਜੀ ਜੋ ਚੀਜ਼ ਜੀ ਦੇ ਚ ਹੁੰਦੀ ਆ ਹੂੰ ਇਹ ਗੋਣ ਹੀ ਨੇ ਉਹ ਕੀਤੇ ਨੇ ਭਗਾਨੇ ਕੋਲ ਦੂਜੇ ਹੂੰ ਮੇਰੇ ਵੱਡੂ ਜੂਏ ਦੇ ਪੈ ਗਏ ਆ ਇਹ ਤਾਂ ਚਲਾ ਕੀ ਜਾਂਦੇ ਨੇ ਉਹ ਤਾਂ ਜੀ ਰਉ ਦੇ ਕੋਲ ਠੀਕ ਹੈ ਸਤ ਰੂਪ ਸਤ ਸੋਕ ਸਤ ਰੂਪ ਦਾ ਦਰਸ਼ਨ ਹੋ ਗਿਆ ਇਹ ਸਮਝ ਲਿਆ ਕੀ ਹੈ ਸਤ ਸੋਕ ਸਮਝ ਲਿਆ ਕੀ ਹੈ ਸਤ ਨਾਮ ਸਮਝ ਲਿਆ ਕੀ ਹੈ ਇਹ ਸਾਰੀ ਸਮਝ ਹਿਰਦੇ ਚ ਰੱਖ ਲਈ ਇਹਨੂੰ ਸਤਿ ਰੂਪ ਹੀ ਆਪ ਸਾਤ ਰੂਪ ਹੀ ਆ ਸਾਤੋ ਰੂਪ ਆਪਾਂ ਕੀ ਕਹਾਂਗੇ ਵੀ ਜਿਹੜਾ ਹੁਕਮ ਹੈ ਉਹ ਸਤ ਸਰੂਪ ਹੈ ਇਹ ਨਾਟਕ ਦਾ ਗਿਆਨ ਅੱਛਾ ਜੀ ਕਰਾ ਗਿਆ ਸਤ ਵਸੂ ਦਾ ਗਿਆਨ ਹੈ ਸਤ ਰੂਪ ਸ਼ੱਕ ਜੋ ਸਰੂਪ ਹੈ ਉਹਦਾ ਗਿਆਨ ਸਤਨਾਮ ਹੈ ਹੂੰ ਹੂੰ ਜੋ ਸਾਤ ਸਰੂਪ ਹੈ ਤਾਂ ਹੈ ਨਾ ਵਸਤੂ ਹੂੰ ਹੂੰ ਇਹਦਾ ਆ ਸਾਤ ਨਾਮ ਉਹਦਾ ਗੁਣ ਹੈ ਠੀਕ ਹੈ ਜੀ ਉਹਦਾ ਗਿਆਨ ਹੂੰ ਸਾਤ ਸੁਭਦ ਹੋ ਗਿਆ ਹੈ ਕੈਸਾ ਸਰੂਪ ਆਪਣਾ ਆਪਣੇ ਵਿੱਚ ਰੱਖ ਲਿਆ। ਕੈਸਾ ਸਰੂਪ ਆ ਉਹਦਾ ਸਾਤ ਸੂਪਰੀਆ। ਅੰਦਰ ਦਾ ਗਿਆਨ ਵੀ ਹੈ। ਹੂੰ। ਪਰ ਸੰਦੋਖ ਵੀ ਹੈ। ਸਾ ਸੰਦੋਖ ਵੀ ਹੈ, ਸਾਤ ਸਰੂਪ ਦਾ ਗਿਆਨ ਵੀ ਐਸੀ ਮੂਰਤ ਨੂੰ ਆਪਣੇ ਹਿਰਦੇ ਚ ਖਾਇਆ ਹੋਇਆ ਆਪਣੀ ਐਸੀ ਮੂਰਤ ਬਣ ਕੇ ਆਪਣੇ ਹਿਰਦੇ ਚ ਟਿਕਿਆ ठीक हो गए हां जी हां जी आदपुरुष परतक लिखियो अक्षर मस्तक तुर आदपुरुष हम्म परतक लिखियो हम्म अक्षर मस्तक आदपुरुष जेड़ा हम्म वो तो परतक हो गया हाँ जी। हाँ जी, हो, हो, नहीं नहीं। नहीं। तो, तो, तो देख लिया आपने ਉਹ ਉਹਦੇ ਤਾਂ ਉਹਨੂੰ ਕੋਈ ਚੁਪੀ ਗੱਲ ਨਹੀਂ ਰਹੀ ਆਜਪੁਰਖਾ ਦਾ ਤਾਂ ਦਲਹਿਬ ਹੋਇਆ ਆਜਪੁਰਖਾ ਤਾਂ ਆਪਈ ਹੈ ਲਿਖਿਓ ਅੱਖਰ ਬਸ ਤੋਰ ਹਾਂਜੀ ਆਜੇ ਅਪਯਾਦ ਕੀਤਾ ਹੂੰ ਹੂੰ ਇਹ ਤੁਰਕੀ ਬਾਣੀ ਆ ਜੋ ਲਿਖੇ ਨੇ ਜੋ ਕਹਿੰਦਾ ਅੱਖਰ ਲਿਖੇ ਇਹੀ ਗਾਉਂ ਹਮ ਹਮ ਇਹ ਤੋਰਾਂ ਬੱਲੇ ਕਿਹਾ ਨੇ ਹਮ ਜੋ ਲਿਖੇ ਨੇ ਉਹੀ ਦੱਸ ਰਿਹਾ ਹਮ ਸਮਝਿਆ ਦੱਸ ਰਿਹਾ ਹਮਾਰੇ ਨਾਲ ਲੈ ਦੱਸੇ ਨਹੀਂ ਜੋ ਸਮਝੇ ਤਾਂ ਹੋਰ ਕੀ ਦੱਸੇ ਠੀਕ ਹੈ ਹਾਂ ਜੀ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਓ ਪ੍ਰਗਟ ਜੋਤ ਜਗਮਗੈ ਜੋਤ ਪ੍ਰਗਟਾਉਂਦੇ ਜਗਮਗ ਕਰਦੇ ਤੇਜ ਤੇਰੇ ਤੋਂ ਪਤਾ ਲੱਗਦਾ ਹੇਰੇ ਉਹ ਹਜੂਰ ਦਾ ਸਰਸਾਲ ਤੇ ਛਾਇਆ ਹੋਇਆ ਸਰਸਾਲ ਦਰਸ਼ਨ ਕਰਕੇ ਹੀ ਤਰਜੰਤ ਹੈ ਹਮ ਸਰਸਾਲ ਪ੍ਰਭਾਵ ਜਾਂ ਲੈਂਦਾ ਦੇਖ ਕੇ ਉਦੋਂ ਹੀ ਪਤਾ ਲੱਗਿਆ ਕਿ ਬੋਲਣ ਦਾ ਪਹਿਲਾਂ ਹੀ ਆਇਆ ਜਾਂਦਾ ਹਮ ਕਰਕੇ ਹੀ ਹੋ ਜਾਂਦੀ ਹੈ ਬੜੋ ਬਧੀ ਆਪ ਆਪਣੇ ਆਪ ਹੀ ਸਰਸਾਲ ਸਾਥੀ ਪਛਾਨਦਾ ਐਸੀ ਅਵਸਥਾ ਬਣੀ ਹੋਈ ਐ ਹਮ ਹਮ ਐਸਾ ਪ੍ਰਗਟ ਹੈ ਜੋ ਹਮ ਹਮ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਾਰਸ ਹਮ ਪਰਸ ਹਮ ਪਾਰ ਜਦੂ ਪਸਤੇ ਹਮ ਪਾਰ ਕੋਣ ਸੀ ਹਮ ਪਸੰਦਿਆ ਹਾਂ ਪਰਸ ਪਰਸ ਕੇ ਹਾਂਜੀ ਕੁਰਤੋਂ ਗੁਰੂ ਦੇ ਜੋ ਕੁਝ ਕਹਾਇਆ ਕਹਾਇਆ ਜੋ ਜੋ ਪਾਰਸ ਸ਼ਬਦ ਆ ਰਿਹਾ ਤੁਰਤੀ ਬਾਣੀ ਯੂਦ ਹੀ ਰਹੀ ਹੈ ਉਹਦੇ ਨਾਲ ਛੋ ਲੱਗਦੀ ਰਹੀ ਹੈ ਉਹ ਜਿਹੜਾ ਕਹਾਇਆ ਗੁਰੂ ਨੇ ਉਹ ਬੁਲਾਉਦਾ ਰਿਹਾ ਗਿਆਨ ਕਹਾਇਆ ਕਿ ਨਾ ਗੁਰੂ ਵੀ ਕਹਾਇਆ ਜੋ ਕਹਾਇਆ ਉਹ ਗਿਆਨ ਹੈ ਜਿਹਨੇ ਕਹਾਇਆ ਉਹ ਗੁਰੂ ਹੈ ਹਮ ਹਮ ਕਿਹੜਾ ਸ਼ਬਦ ਆਇਆ ਤੁਰਕੀ ਬਾਣੀ ਮੱਖਣ ਉਹ ਗੁਰੂ ਸੀ ਠੀਕ ਹੈ ਜੀ ਜੋ ਬਾਣੀ ਆਈ ਉਹ ਜਿਹੜਾ ਮੱਖਣ ਸੀ ਉਹ ਚ ਸੀ ਉਹ ਗੁਰੂ ਸੀ ਦਿੱਤਾ ਗਿਆ ਲਫਜ਼ਾਂ ਦੇ ਬਾਹਰ ਚ ਗਿਆ ਉਹ ਗਿਆਨ ਹੋ ਗਿਆ ਗੁਰੂ ਹੈ ਗੁਰੂ ਗੁਰ ਤੇ ਸਿਹਾਰੀ ਹੈ ਜੀ ਗੁਰ ਤੋਂ ਗੁਰੂ ਨੇ ਕੋਹਾਇਆ ਹਾਂ ਗੁਰੂ ਦੇ ਗੋਸਤ ਕੋਹਾਇਆ ਹੂੰ ਤੇ ਇਹ ਫਿਰ ਅਰਥ ਕਰਦੇ ਆ ਇਹ ਪਰਸ ਨੂੰ ਛੂ ਕੇ ਗੁਰੂ ਤੋਂ ਗੁਰੂ ਅਖਵਾਏ ਗੁਰੂ ਦੁਆਰਾ ਗੁਰੂ ਨੇ ਕਿਹਾ ਹਾਂਜੀ ਇਹ ਅਰਥ ਬਣਦੀ ਗੁਰਦੇਵ ਦੁਆਰਾ ਗੁਰੂ ਨੇ કહਿਆ ਹੂੰ ਦੁਆਰਾ ਦੇ ਵੀ ਇੱਥੇ ਕਹਿੰਦੇ ਆ ਜਿਹੜਾ ਜਿਹੜਾ ਸਰੀਰ ਦੇ ਬਣਾਇਉਂਦਾ ਹੈ ਇੱਥੇ ਦੁਆਰਾ ਕਹਿੰਦੇ ਹੂੰ ਇੱਥੇ ਠੀਕ ਹੈ ਜੀ ਗੁਰਦੇਵ ਜੜੀਏ ਕਹਾਇਆ ਸਭ ਆਸ ਗੁਪਤ ਦਿੱਤਾ ਸਪਾਰਸ਼ ਤੋਂ ਜਿਹੜਾ ਉਹ ਨਾ ਦੇ ਤਾ ਹੂੰ ਗੁਰੂ ਦੁਆਰਾ ਕਹਾਇਆ ਹੈ ਹਾਂਜੀ ਗੁਰੂ ਸਭ ਕਹਿਣ ਦਾ ਵਾਲਾ ਸਤਗੁਰ ਤੋਂ ਕਹਾਇਆ ਕਹਾਇਆ ਗੁਰੂ ਹੈ ਕਹਿਣ ਵਾਲਾ ਸਤਗੁਰ ਬੋਲਣ ਵਾਲਾ ਗੁਰੂ ਹਾਂਜੀ ਹਾਂਜੀ ਮਥੁਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਪਨਮਥਰਾ ਮੂਰਤ ਸਦਾ ਹੂੰ ਮਥਰਾ ਕਹਿੰਦਾ ਹੈ ਜੀ ਇਹ ਮੂਰਤ ਪਿਆਤਾਲ ਸਦਾ ਮੂਰਤੀ ਸਦਾ ਜੀ ਲਾਏ ਜਦ ਲਾਇਕ ਹੂੰ ਇਹ ਜਨਾ ਇਤਲਾਕ ਇੱਥੇ ਰੋ ਕੇ ਸਤਿਗੁਰ ਹੋਵੇ ਸਤਿਗੁਰ ਹੋ ਉਹ ਦੇਖ ਰਿਹਾ ਅਰਜਨ ਸਤਗੁਰ ਨੂੰ ਉਹ ਨੂੰ ਕਹਿ ਰਿਹਾ ਆਪਣੇ ਆਪ ਨੂੰ ਕਹਿ ਰਿਹਾ ਇਹਦੇ ਨਾਲ ਕਹਿਣਾ ਜੁੜਿਆ ਰਿਹਾ ਹੂੰ ਹੂੰ ਇਹ ਮੂਰਤ ਹੈ ਹੋਰ ਕੋਈ ਨਹੀਂ ਆ ਮੂਰਤ ਠੀਕ ਹੈ ਉਹ ਦਰਲੀ ਮੂਰਤ ਦੇਖਣਾ ਬਾਹਲੀ ਨਹੀਂ ਦੇਖਿਆ ਉਹ ਆਹ ਉਹ ਜੋਤ ਨੂੰ ਦੇਖ ਰਿਹਾ ਮਸਲਾ ਯਾਤਰਾ ਨੂੰ ਸਰੀਰ ਨੂੰ ਦੇਖ ਰਿਹਾ ਹੂੰ ਉਹ ਕਾਹਨ ਬੋਲਦੀ ਸਾਖਾ ਬੋਲਦੀ ਗੱਲ ਕਰਿਆ ਸਰੀਰ ਤਾਂ ਸਾਦਾ ਰਹਿ ਹੀ ਨਹੀਂ ਹੂੰ ਮੂਤੀ ਦਾ ਘਾਟਾ ਨਾਲ ਸਫਾ ਲਾਫੀ ਦੀ ਲਾਤਾ ਉਹਨੂੰ ਹੂੰ ਤੇ ਫਿਰ ਵੀ ਲਾਤਾ ਨਾਲ ਹੂੰ ਲਾ ਕੇ ਚਿੱਤਰ ਖੋਜ ਨਾਲ ਬੋਲੀ ਗਿਆ ਲਾ ਕੇ ਰੱਖੋ ਕੋ ਕਰਾ ਹੋਵੇ ਤਾਂ ਸਨਮੁਖਾ ਤੇ ਖੜਾ ਦੇ ਦਿਓ ਹੂੰ ਹੂੰ ਇਹਦੇ ਨਾ ਦੇ ਦਿਓ ਸਨਮੁਖਾ ਜੋ ਕਹਿੰਦਾ ਉਹ ਬੰਦੇ ਹੋ ਹੂੰ ਹੂੰ ਜਵਾਬ ਨਾ ਕਰ ਔਖੀ ਆ ਗੱਲ ਬੰਦਣੀ ਹੂੰ ਹੂੰ ਸਲਾਮ ਸਲਾਮ ਇਹ ਰੱਖਿਓ ਜਵਾਬ ਨਾ ਦਿਓ ਜਵਾਬ ਨਾ ਕਰਦੇ ਹੋ ਹੂੰ ਜਵਾਬ ਦੇ ਦੋਮਰੇ ਤਲਾ ਫਰ ਮੁੰਡੋ ਕੋ ਥਾ ਜਾਏ ਹੂੰ ਹਾਂਜੀ ਕਲ ਜੁਗੀ ਜਹਾਜ ਅਰਜਣ ਗੁਰੂ सगਲ ਸ੍ਰੇਸ਼ਟ ਲਗ ਬਿੱਤਰੂ ਹਾਂਜੀ ਕਲ ਜੁਗੀ ਜਹਾਜ ਅਰਜਣ ਗੁਰੂ सगਲ ਸ੍ਰੇਸ਼ਟ ਲਗ ਬਿੱਤਰੂ ਹਾਂਜੀ ਨਾ ਕਲ ਜੁਗੀ ਜਹਾਜ ਅਰਜਣ ਗੁਰੂ ਅਰਜਣ ਨੂੰ ਕਹ ਕੋ ਕੜ ਜੁਗੀ ਪੜੀ ਪੈ ਰਿਹਾ ਹੈ ਹੂੰ ਗੁਰੂ ਕਹਦਾ ਦੇ ਜਹਾਜ਼ ਔਰ ਅਰਜੁਨ ਜੁੜਨਗੇ ਆਪਸ ਵਿੱਚ ਨਾ ਨਾ ਗੁਰੂ ਬਿਲਕੁਲ ਨਹੀਂ ਜਹਾਜ਼ ਵੀ ਹੋਪੜਾ ਹਾਂ ਤਾਂ ਜਹਾਜ਼ ਔਰ ਅਰਜੁਨ ਜੋ ਹੈ ਇੱਕ ਗੱਲ ਹੋ ਰਹੀ ਹੈ ਨਾ ਵੀ ਅਰਜੁਨ ਨੂੰ ਜਹਾਜ਼ ਕਿਹਾ ਹੋਇਆ ਹੈ ਉਹਦਾ ਐਡਜੈਕਟਿਵ ਲਾਇਆ ਹੋਇਆ ਨਾ ਗੁਰੂ ਜਹਾਜ਼ ਕਿਹਾ ਹੋਇਆ ਹੂੰ ਹੂੰ ਯਾਦ ਅਰਜੁਨ ਨਾਲ ਜੋੜਨਾ ਜਹਾਜ਼ ਗੁਰੂ ਨਾਲ ਹੂੰ ਕਾਲੀ ਜੁਬ ਜਹਾਜ਼ अर्जुन गुरु अर्जुन ਦਾ ਗੁਰੂ ਜਹਾਜ਼ ਆਇਆ ਕਰ ਜੋ ਵਿੱਚ ਫਿਰ ਦਾ ਨਹੀਂ ਲੱਗ ਸਕਦਾ ਜੀ ਜੇ अर्जुन ਆ ਗਿਆ ਫਿਰ ਆ ਗਿਆ ਜੇ अर्जुन ਨੂੰ ਅੰਕੜਾ ਫਿਰ ਦਾ ਸੰਬੰਧ ਕੀ ਇਹ ਤਾਂ ਹੈ ਤਾਂ ਫਿਰ ਆਪ अर्जुन ਤੇ ਅੱਖਰ ਨੂੰ ਤੋੜਨਾ ਪਊ ਨੇ ਕਲਯੁਗ ਜਹਾਜ਼ अर्जुन ਵੀ ਪਹਿਲਾਂ ਵੀ ਨਾਨਕ ਵਾਸਤੇ ਆਇਆ ਸੀ ਜਹਾਜ਼ ਹਾਂ ਇਹਦਾ ਮਤਲਬ ਅਰਜੁਨ ਵੀ ਗੁਰੂ ਜਹਾਜ ਹੈ ਅਰਜਨ ਅਰਜਨ ਨੂੰ ਫਿਰ ਅਸੀਂ ਅਰਜਨ ਜਿਹੜਾ ਲਫ਼ਜ਼ ਹੈ ਇਹਨੂੰ ਫਿਰ ਅਸੀਂ ਸਾਡਾ ਠੀਕ ਹੈ ਸੰਦੇ ਹਾਂਜੀ ਫਿਰ ਅਸੀਂ ਅਰਜਨ ਮੁਖਾਂ ਦੇ ਅ ਡੈਟਾ ਅਜਿਹਾ ਦਾ ਗੁਰੂ ਹੋਰ ਆਇਆ ਹੈ ਨਾ ਗੁਰੂ ਗਿਆਨ ਗੁਰੂ ਹੈ ਨਾ ਉਹ ਜਹਾਜ ਹਾਂਜੀ ਉਹ ਜਹਾਜ ਹੈ ਹਾਂ ਅਜਿਹਾ ਦਾ ਗੁਰੂ ਜਿਹੜਾ ਜਹਾਜ ਬਣਦਾ ਸਾਲੇ ਵਾਸਤੇ ਹੂੰ ਅਜਿਹਾ ਜਿਹੜੀ ਆ ਰਾਜ ਦਾ ਜਹਾਜ਼ ਪਰ ਜਿਹੜਾ ਪਿੱਛੇ ਸਵਈਆ ਸਿਵਰਜ ਗੁਰ ਜਹਾਜ਼ ਖੇਵਟ ਗੁਰ ਹਾਂ ਉਹ ਗੁਰ ਉਹ ਵੀ ਗਿਆਨ ਹੋਰੇ ਹੂੰ ਬੜਾ ਉਹ ਵੀ ਗਿਆਨ ਕੋਰੇ ਹਾਂ ਜੀ ਗੁਰ ਸਭੀ ਆਧੂਰ ਗੁਰ ਕਾ ਨੇ ਉਹ ਵੀ ਗਿਆਨ ਹੰਦਾ ਹੈ ਉਹਦੇ ਗਿਆਨ ਲਈ ਆ ਕੋਲੀ ਉਹ ਮੋਟਰ ਲੱਗ ਕੇ ਲੱਜੂ ਹੂੰ ਹੂੰ ਅਗਰ ਕੋ ਦਾ ਗਿਆਨ ਨਹੀਂ ਆਪਾਂ ਨਾਲੇ ਗਿਆਨ ਨਾ ਮਿਲੇ ਹੂੰ ਹੂੰ ਇਹਨਾਂ ਫਿਰ ਕੋੜਾ ਪੜੀਦਾ ਦਰ ਅਰਜਨ ਗੁਰੂ ਦਾ ਮਤਲਬ ਆ ਅਰਜਨ ਕੋ ਮੇਰਾ ਹੈ ਦਾ ਉਹ ਜਿਹੜਾ ਜੇ ਸੰਸਾਰ ਦਾ ਸਾਰੇ ਦਾ ਹੀ ਹੋਰ ਕੀ ਹੈ ਯਾਰ ਥੋੜੀ ਹੈ ਕਿਤੇ ਹਮ ਹਮ ਭਰਮ ਦਾ ਹੀ ਨਾਸ ਹੋਣਾ ਹਮ ਹਮ ਅਸਾ ਭਰਮ ਦਾ ਹੀ ਨਾਸ ਹੋਣਾ ਹਮ ਹਮ ਤਸੱਲ ਹੋ ਇਹਨਾਂ ਨਾਲ ਡਾਕਟਰ ਸਾਰੀ ਹੀ ਕਰਦੇ। ਵੀਤਰੋ ਹਾਂਜੀ। ਭਾਰੀ ਤਰ੍ਹਾਂ ਤਨ ਤੇ ਗਿਆਨ ਗੁਰੂ ਨਾਲ ਕਹਿਣ ਦਾ ਮਤਲਬ ਇਹ ਹੈ। ਹੂੰ ਹੂੰ। ਇਹ ਗਿਆਨ ਕਰਜੋ ਜਿਹਨਾਂ ਨਾਲ ਜੋ ਗਿਆਨ ਕਰਾ ਰਿਹਾ ਜਿਹਨਾਂ ਨਾਲ ਕਰਜੋ ਫਿਰ ਉਹਨਾਂ ਦਾ ਇਹ ਹੀ ਠੀਕ ਹੈ ਹਾਂਜੀ ਗੱਲ ਇਹ ਰਿਹਾ ਜੋ ਆਜਨ ਇਹ ਤੇ ਹੈ ਅੱਜ ਜਿਹੜੀ ਸਾਡੇ ਕੋਲ ਕੁਰਬਾਨੀ ਹੈ ਇਹਦਾ ਜਿਹੜਾ ਉਪਦੇਸ਼ ਹੈ ਜਿਹੜਾ ਗਿਆਨ ਹੈ ਉਸ ਨੇ ਢਾਲਦਾ ਅੱਜ ਵੀ ਹੂੰ ਇਹ ਤਰ੍ਹਾਂ ਉੱਡਣਾ ਹਰ ਜਨ ਸਾਡੇ ਕੋਲ ਹੈ ਜਿਹੜਾ ਹੈਗਾ ਉਹ ਜਿਹੜਾ ਗਿਆਨ ਨੇ ਉਹ ਹੀ ਆ ਜਿਹੜਾ ਜੋ ਉਪਦੇਸ਼ ਤਾਂ ਉਹ ਹੀ ਸਾਡੇ ਕੋਲ ਜੋ ਬਾਣ ਚੌਦਰੀ ਬਾਣ ਨੇ ਹਜ਼ਰ ਦੇ ਬਾਣ ਦੇ ਉੱਤੇ ਹਾਂਜੀ ਆ ਬਾਣ ਹੀ ਹੈ ਤੇ ਬਾਣ ਨੇ ਹੂੰ ਹੂੰ ਕੋਰ ਬਾਣ ਹੀ ਹੈ ਉਹਨਾਰੇ ਆ ਹੂੰ ਮਣਿਆਲੇ ਆਣੀਆਂ ਨਾ ਸਿੱਧੀ ਦਾ ਕੋਈ ਪੁੱਛਣ ਵਾਲੀ ਆ ਕੁਝ ਕਹਿਣ ਵਾਲੀ ਆ ਅਗਰ ਲੋਕੋ ਕੁਝ ਕਰੀਆ ਹੋ ਹੈ ਦੀ ਜੋ ਹੈ ਉਹ ਘੇਰੀ ਜੈ ਸਰਦੀ ਹੂੰ ਹੂੰ ਉਹਨਾਂ ਹੁੰਦੀ ਆ ਨਾ ਵਿੱਚੇ ਦੇ ਹਾਂ ਭਾਜਾ ਦੀ ਪ੍ਰੋਬਲਮ ਹੁੰਦੀ ਹੈ ਠੀਕ ਹੈ ਭਾਜਾ ਦੀ ਪ੍ਰੋਬਲਮ ਹੁੰਦੀ ਹੈ ਡਾ ਲੈਟ ਭਾਜਾ ਦੀ ਹੈ ਹਾਂ ਹਾਂ ਸਰ ਜੀ ਠੀਕ ਹੈ ਹਾਂ ਹਾਂ ਜੀ ਹੁਣ ਅਗਲਾ ਸੋਈਏ ਸ਼ੁਰੂ ਹੈ ਜੀ ਤੋ ਇਹ ਜਨ ਜਾਣਚੋ ਪਰ ਜਾਣੀਅਤ ਹਾਂ ਬਾਸੁਰ ਇਹ ਗਾਣਾ ਜਾਟੋ ਜਗਤਰ ਪਰ ਚਾ ਦੀਤ ਬਾਸਰ ਰੈਣ ਰਾਤ ਪਾਜ ਜਾ ਕੇ ਉਪਕ ਨਿਤਰਾਮ ਸੂ ਉਸ ਨਾਲ ਉਹ ਸਾਗ ਵੀ ਉਹ ਤਪੁਰਕ ਤੇ ਯਾਨੀ ਇਹ ਦ ਬਾਸਰ ਗੱਲ ਹੂੰ ਹੂੰ ਆ ਪਾਸਰ ਲੈਣ ਹੂੰ ਹੂੰ ਯਾਨੀ ਇਹ ਦ ਬਾਸਰ ਲੈਣ ਨਾਲ ਹੋਵੇ ਨਾ ਹੂੰ ਰਾਤ ਨੂੰ ਕਹਿੰਦੇ ਨੇ ਬਸ ਦਲੂ ਕਹਿੰਦੇ ਨੇ ਜਿਹੜਾ ਇਹ ਜਾਣ ਲਈ ਆਪਾਂ ਜਸ ਗੋਦ ਲਈਏ ਹਮਮ ਸਭ ਲਈ ਸਾਨੂੰ ਯਕੀਨ ਹੋ ਜਵੇ ਅਈਓ 24 ਘੰਟੇ ਦਿਨ ਰਾਤ ਨਾਮ ਨਾਲ ਜੁੜਿਆ ਰਹਿੰਦਾ ਹਮ ਇਹ ਜਾਣਦੇ ਉਹ ਤੋਂ ਕੁਝ ਉਹਦੇ ਉਹ ਤੋਂ ਕੁਝ ਜਾਣ ਲਈਦਾ ਹਮ ਜਦਾਂ ਇਹ ਪੱਕਾ ਪੜਾਉਣ ਲੱਗੇ ਉਹਦਾ ਗਿਆਨ ਹੀ ਲਈਦਾ ਉਹ ਕੁਝ ਹੋ ਰਹੇ ਹੁੰਦਾ ਉਹਦੇ ਅਛੇ ਉਹ ਆਇਆ ਧਾਰੀ ਹਾਂ ਠੀਕ ਹੈ ਜੀ ਪਰਮ ਅਤੀਤ ਪਰਮੇਸ਼ਰ ਕੇ ਰੰਗ ਰੰਗੋ ਬਾਸਨਾ ਤੇ ਬਾਹਰ ਪੈ ਦੇਖੀਐ ਤ ਧਾਮ ਆ ਪਰਮਾਤਮਾ ਜੁਗ ਸੱਚ ਹੂੰ ਹੂੰ ਵਰਗੁ ਤੇ ਦੀ ਆਸ ਹੈ ਹੂੰ ਹੂੰ ਰੰਗ ਰੱਖ ਰਭੋ ਉਹਦੇ ਰੱਖ ਬਿਚ ਰਭੋ ਆਪਣੇ ਆਪ ਨੂੰ ਹੂੰ ਹੂੰ ਰੰਗੋ ਹੂੰ ਮੇਰਾ ਜਾਨੇ ਹਾਂਜੀ ਰੰਗ ਰੰਗ ਹਾਂਜੀ ਇਹ ਹੀ ਆ ਵੀ ਹੈ ਪੈਚ ਆ ਠੀਕ ਹੈ ਜੀ ਮਾਰ ਮਾਰੀ ਤੇ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਹੋਣਾ ਚਾਹੀਦਾ ਉਹ ਹੂੰ ਰੰਗਿਆ ਹੋਵੇ ਹੂੰ ਮਤਬੂਤ ਨਾ ਜੀ ਹਾਂਜੀ ਪਰਮੇਸ਼ਰ ਕੇ ਰੰਗ ਰੰਗਿਓ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਹੋਣਾ ਚਾਹੀਦਾ ਉਹ ਹਾਂ ਤੇ ਬਾਗ ਹੂੰ ਆਪਣਾ ਸਾਧਗੀ ਦੀਆਂ ਬਾਤਾਂ ਨਾਲ ਦੇ ਦੋ ਪਰੇ ਰਹੇ ਹੋ ਇਹ ਤਾਂ ਬਖਿਆਈਂਦਾ ਹਾਂ ਹਾਂ ਠੀਕ ਹੈ ਜੀ ਆ ਦੇਖੀਏ ਤਾਂ ਸਾਫ ਹੈ ਕਿਉਂ ਦੇਖਣ ਨੂੰ ਜਿਹੜਾ ਤੁਸੀਂ ਇਹਨੂੰ ਉਪਦੇਸ਼ ਹੈ ਉਹਦਾ ਟੈਕਸਟ ਉੱਥੇ ਹੈ ਤੁਹਾਨੂੰ ਹੂੰ ਹੂੰ ਪਰਖ ਲਿਓ ਬਈ ਠੀਕ ਹੈ ਜੀ ਪਰਖ ਹੈ ਗੁਰਤੀ ਬਾਤ ਕਰੀ ਹੂੰ ਹੂੰ ਉਹਦੀ ਤਨ ਪਰਖ ਕਰ ਲਿਓ ਜੋ ਸੌਦਾ ਲੈਣਾ ਉਹ ਵੀ ਪਹਿਨੇ ਕਰਦੇ ਨੇ ਨਾ ਅਪਰ ਪਰੰਪਰ ਕੋਰਖ ਸਿਓ ਪ੍ਰੇਮ ਲੱਗਿਓ ਉਹਦਾ ਅਪਰ ਪਰੰਪਰ ਕੋਰਖ ਦਾਰ ਪ੍ਰੇਮ ਲੱਗਿਆ ਰਹਾ ਹੁਣ ਵਿਚਾਈ ਚਾਹ ਹਮ ਹਮ ਲਾਜ ਹਾਂਜੀ ਬਿਨ ਭਗਵਾਨ ਤ ਰਸ ਕਾਮ ਸਿਓ ਉਹ ਵਾਸਤੇ ਮਨਾਂ ਹੋਰ ਕਿਸੇ ਦੇ ਵੀ ਰਾਸ ਨਾਲੋਂ ਦਾ ਕੋਈ ਬਤਲ ਬਣਾ ਹੋਵੇ ਠੀਕ ਹੈ ਜੀ ਰਸ ਤੋਂ ਬਿਨਾ ਹੋਵੇ ਕਿਸੇ ਰਾਸ ਨਾਲੋਂ ਕੋਈ ਮਤਲਬ ਨਹੀਂ ਹੋਦਾ ਠੀਕ मथुरा hmm. को प्रभु सबर में अर्जुन गुरु भक्ति का हेत पाले रहे हो नर राम से मथुरा को प्रभु सबर में प्रभु में अर्जुन को हां सबर में कार्य में बीच मथुरा को जेड़ा प्रभु है हां जी कार्य में बीच होया है ਹੂੰ ਉਹ ਅਰਜਨ ਉਹ ਅਰਜਨ ਹੀ ਗੁਰਖਾਈ ਦਾ ਹੋਇਆ ਹੈ ਕੋਈ ਸਾਰਿਆਂ ਦੀ ਮੂਰ ਹੈ ਕੋਈ ਆ ਉਹ ਸ਼ੁੱਧ ਆਤਮਾ ਇੱਕੋ ਹੀ ਰਹੀ ਐ ਸਾਰਿਆਂ ਦੀ ਉਹ ਦੋ ਹੀ ਬੰਦੇ ਗਏ ਬਾਹਰ ਟੱਡ ਬੰਦੇ ਗਏ ਅੱਛਾ ਕਿਸੇ ਦੀ ਗੱਲ ਨਹੀਂ ਕੀਤੀ ਕਿਹੜਾ ਅਜੜ ਦਾ ਗੋੜਾ ਉਹੀ ਥਾਂ ਦੇ ਵਿੱਚ ਹੂੰ ਹੂੰ ਤਬ ਆ ਕਰਕੇ ਕੋਈ ਆਹੋ ਠੀਕ ਹੈ ਜੀ ਬਾਹਲੇ ਦਾ ਸਵਾਗਤ ਹੈ ਬਲੇ ਦਾ ਸਵਾਗਤ ਹੈਗਾ ਹੂੰ ਉਹਦਾ ਭਗਤੀ ਕਹਿ ਹੋਰ ਮਿਲ ਰਾਮ ਸਿਉ ਭਗਤੀ ਦੇ ਪਾਏ ਅੱਛਾ ਜੀ ਆ ਰਿਹਾ ਮਿਲ ਰਾਮ ਹਾਂ ਭਗਤੀ ਬਾਸ ਇਹ ਭਗਤੀ ਬਾਸ ਤੇ ਰਾਮ ਦੇ ਚਰਣਾ ਨਾਮ ਲੈਂਦੇ ਹਾਂ ਹਾਂ ਪਾਇ ਰਹੇ ਹੋ ਹੈ ਜੀ ਪਾਇ ਹਾਂ ਅਗਲੇ ਪਾਣੇ ਪਾਇ ਰਾਮ ਦੇ ਚਰਣਾ ਹੀ ਰਹਿੰਦੇ ਆ ਠੀਕ ਹੈ